श्लोक अगम आगाद <दिण> पारब्रह्म सोए जो जो कहे सो मुक्ता होई अगम आगाद पारब्रह्म सोए जो जो कहे सो मुक्ता होए सुन बीता नारक बिनु बंता साधु जन की अचरज कथा सुन मितता नारक बिनु बंता साधु जन की अचरज कथा अचरज की कथा ये अचरज की कथा है ये अचरज की ਅਚਰਜ ਕਥਾ ਹੈ ਅਚਰਜ ਉਹ ਜਦੋਂ ਕਥਾ ਕਦੇ ਸੁਣੀਓ ਨਹੀਂ ਇਹ ਕਦਾ ਕਦੇ ਇਹ ਨਹੀਂ ਅਚਰਜ ਕਥਾ ਦਾ ਹੈ ਉਹ ਇਹ ਅਚਰਜ ਰਹੇ ਡੀ ਦਤੀ ਇਹ ਅਚਰਜ ਕਥਾ ਸਭ ਦੀ ਜਾ ਸਕੀ ਵਿਚਾਰੇ ਨਹੀਂ ਜਾ ਸਕੇ ਇਹ ਅਚਰਜ ਤਾਂ ਹੀ ਅਚਰਜਤਾ ਗਾਇਬ ਹੋ ਗਈ ਉਹ ਜੇ ਸਹੀ ਕਥਾ ਕਰੀਏ ਫਿਰ ਅਚਰਜੇ ਆਸਚਰਯ ਹੁੰਦਾ ਹਰ ਅੰਭੂਟੀਏ ਸੁਣ ਕੇ ਜੇ ਉਹ ਅਚਰਜਤਾ ਖਤਮ ਹੋ ਜਾ ਨਾ ਬੁਝੀਏ ਇਹਦੇ ਵਿੱਚ ਬੁਝਣ ਬਹੁਤ ਗੱਲ ਹੈ ਬੁਝੇ ਤੇ ਅਚਰਜਾ ਬੰਦ ਬੁਝੇ ਤੇ ਫਿਰ ਉਹ ਅਚਰਜਤਾ ਖਤਮ ਹੋ ਜਾਂਦੀ ਹੈ ਫਿਰ ਪਸੂ ਵਾਲੀ ਗੱਲ ਹੈ ਪਸੂ ਢੋਹਾਂ ਵਾਲੀ ਹੋ ਜਾਂਦੀ ਫਿਰ ਪਸੂ ਢੋਹ ਕੇ ਬਾਹਰਲੇ ਸਰੀਰ ਤੇ ਸਾਰੀ ਕਥਾ ਕੱਢੀ ਜਾਂਦੀ ਹੈ बाहरी यो गल रह जाती है अदली मुक जाती है आत्मिक ज्ञान सक्षम हो जाता है बाहरी ज्ञान रह जाती है हां जी राम आघात पार ब्रह्म सोए जो जो कहे सो शुरू करता है आचार्य गुरु का आंगबावाद है बुद्धि तो परे बंदा नहीं जिद्दी बुद्धि च कथा आ जाती होगी ਜਿਹੜਾ ਕੋ समझ भी सके, ਜਿਹੜਾ ਇਹਨੂੰ अर्था भी सके, ਜਿੰਨਾ ਜਗਤ ਕੇ ਉਹ ਪਾਸ਼ਾ ਜਿਹੜੀ ਹੈਗੀ ਹੈ ਵਿਦਿਆ ਜਿਹੜੀ ਉਹ ਪੜੀ ਹੈ ਸੰਸਾਰਿਓ ਨੂੰ ਸੋਧਣ ਲੱਗੂ ਸੋਧੀ ਹੋਈ ਬਤੇ ਅਸੀਂ ਇਹਨੂੰ ਸੋਧੀ ਹੋਈ ਬਦਦੇ ਦੀ ਕੋਈ ਦੇ ਕਾਰਿਆਂ ਉਹਦੇ ਨਾਲ ਅਰਥ ਵਿੱਚ ਅਪਲਾਈ ਕਰਕੇ ਦੇਖਣੀ ਜਾਂ ਕਰਨਾ ਅਚਰਿਤ ਕਹਾਣੀ ਪਾਰਬ੍ਰੰਧ ਹੈ ਜਿਹੜਾ ਉਹ ਕੀ ਹੈ ਉਹਦੀ ਕਥਾ ਅਸਰਤ ਹਰ ਜੀ ਕਥਾ ਜਿਹੜਾ ਕਾਰ ਦੀ ਕਥਾ ਦਰਮਕਾਰ ਕੀ ਹੈ ਉਹਦਾ ਉਹਦੀ ਕਹਾਣੀ ਹੈ ਰਾਜਾ ਰਾਮ ਦੀ ਕਹਾਣੀ ਹੈ ਉਹ ਤਾਂ ਚੱਜੇ ਹੋ ਅਖੜੂ ਦੀ ਕਿਹੜੇ ਗੱਲ ਸੁਣ ਰਿਆਂ ਦੀ ਕਿਹੜੇ ਦੇਸ਼ ਦਾ ਇਹਦਾ ਪਤਾ ਨਹੀਂ ਉਹਦਾ ਮਾਪਾਪਾ ਕੌਣ ਹੈ ਇਹਦਾ ਪਤਾ ਨਹੀਂ ਜਦ ਦਾ ਮਰਦਾ ਉਹ ਹੈ ਜੀ ਉਹ ਤੋਂ ਕਥਨ ਕਰਦੇ ਤਾਂ ਬਹੁਤ ਮੁਸ਼ਕਲ ਗੱਲ ਹੈ ਕੋਈ 350 ਦਾ ਹੈ ਜੀ ਡਰਸ ਹੈਗਾ ਵੀ ਹੈ ਉਹ ਕਹਿੰਦਾ ਦੱਸ ਕਿੱਥੇ ਹੈ ਉਹ ਕਹਿੰਦਾ ਤੁਹ ਦਾਸ ਕਿੱਥੇ ਹੈ ਜੀ ਤੁੰ ਦਾਸ ਕਿੱਥੇ ਹੈ ਜੀ ਮੈਂ ਤਾਂ ਦੰਦ ਦਾ ਸੰਕਟ ਹੈ ਜੋ ਉਹ ਤਾਂ ਸਮਝੇਗਾ ਜੇਕਰ ਤੂੰ ਬੋਲਦਾ ਤੂੰ ਤਾਂ ਜਿੱਤੇ ਹੈ ਜੀ ਫਿਰ ਅਲ ਨਾਲ ਦੇਖਦਾ ਸਵਾਲ ਕਰਨਾ ਕਿ ਕਾਸ ਤੂੰ ਜਿੱਤੇ ਹੈ ਜੀ ਸਾਡੀ ਦੁਨੀਆ ਮੰਦੀ ਹੈ ਹਰ ਜਗ੍ਹਾ ਹੋ ਮਕਮਲ ਹਰ ਜਗ੍ਹਾ ਮਕਮਲ ਉਹ ਤੇ ਪ੍ਰਗਟ ਰੂਪ ਚ ਹਰ ਜਗ੍ਹਾ ਹੈ ਪਰ ਜੋਤ ਰੂਪ ਦਾ ਗੋਪਤ ਹੈ ਉਹਦਾ ਗੋਪਤ ਹੈ ਹਨ ਪ੍ਰਗਟਤਾ बेहोश ਪਿਆ ਜੋਤ ਵਿਚਾਈ ਗੋਪਤ ਹੈ ਲੈ ਲਓ ਹਾਂ ਵੀ बेहोश ਪਿਆ ਜੋਤ ਵਿਚਈਆ ਜਿਹੜਾ ਗੋਪਤ ਹੈ ਵਰਗਟੂ ਹੋਣਾ ਗੜੇ ਬੋਲ ਪ੍ਰਗਟ ਕਰ ਗਾਉਂਗਾ ਜੇ ਵਰਗਟ ਕਰੂਗਾ ਜੇ ਪ੍ਰਗਟ ਹੋਊਗਾ ਬੋਲਦੇ ਤੇ ਕਹਾਂ ਗਏ ਪਾਪਾ ਹਨ ਬੋਲਦੇ ਸੀ ਕਹਾਂ ਬੋਲਦੇ ਤੇ ਕਹਾਂ ਗਏ ਦੇਹੀ ਦੇ ਹੀ ਕੇ ਸੰਗ ਰਹਤੇ ਤੇ ਹੀ ਦੇ ਨਾਲ ਉਹੀ ਇਹਨਾਂ ਸੀ ਜਿਹੜਾ ਬੋਲਦਾ ਸੀ ਕਥਾ ਵਾਰਤਾ ਕਰਦੇ ਕਥਾ ਵਾਰਤਾ ਕਰਦੇ ਜਿਵੇਂ ਕਹਿੰਦੇ ਨੇ ਸੰਸਾਰ ਨੇ ਝੋਪੇ ਕਰਕੇ ਸੂਗਾ ਜਾ ਮਨ ਜੋ ਪਕਰ ਜਾਣਦਾ ਤਾਂ ਹੀ ਸੋਧ ਕਹਿ ਦੇ ਦਸਾਂਗਾ ਹੋਦਾ ਪਰਗਟ ਅਗੰ ਅਗਾਦ ਪਰ ਬ੍ਰਭ ਸੋਏ ਜੋ ਕਹੇ ਸੋ ਮੁਕਤਾ ਹੋਏ ਜੋ ਪਰ ਬ੍ਰਹਮ ਤਿਕਤਾ ਅਗੰਬ ਬੁਰਖੀ ਬੁੱਧੀ ਤੋਂ ਪਰੇ ਬੁਰਖੀ ਬੁੱਧੀ ਕੋਲ ਕੀ ਆ ਪੰਜ ਗਿਆਨ ਦੇ ਤਰੇਯਾ ਯਾ ਯਾ ਸੱਟਾਉਂਦਾ ਜੈਸਾ ਫਸਲਦਾ ਜਦ ਬੰਝ ਗਿਆ ਨੰਦ ਜੀ ਆ ਬੇ ਅੰਬਾਜਾ ਜੱਜਮੈਂਟ 6 ਵੀ ਜੱਜਮੈਂਟ ਉਹ ਯਰ ਤੇਸ ਕੇ ਉਪਰ ਖਿੜਕੀ ਆ ਹੋ ਰਹਾ ਕੋ ਇਹ ਖਿੜਕੀ ਕੈਸਾ ਅਲੱਗ ਹੈ ਕੈਸਾ ਧੀ ਖਿੜਕੀ ਨਹੀਂ ਕਰਨੀ ਚੱਲਪਾਂ ਬਣਾ ਲਿਆ ਵਜ਼ੀਰ ਤੇ ਕੋਈ ਉਹ ਗੈਸ ਲਾਏ ਉਹਦੇ ਸਾਰੇ ਪਰਬੰਦ ਇੱਕ ਪਾਸੇ ਤਾਂ ਮਨਮਤਾ ਨੇ ਗੈਸ ਲਾਏ ਉਹਦੇ ਪਰਬੰਦ ਇੱਕ ਪਾਸੇ ਇਹ ਕਿ ਹੈ ਅਗਮ ਅਗਵਾਦ ਵਰ ਵਰਮ ਸੋਏ ਜੋ ਜੋ ਇਹ ਗੱਲ ਬੰਦੂਗਾ ਕਹੂਗਾ ਵੀ ਹਾਂ ਪਾ ਅਗਵਾਦ ਹੈ ਉਹ ਮੁਕਤੀ ਵਿੜੂ ਮੁਕਤੀ ਕਿਸੇ ਰੂਪ ਨਹੀਂ ਬਣਨਾ ਜਿਦੀਆ ਦੁਨੀਆ ਦੀਆਂ ਮੱਤਾ ਦੀ ਮੁਕਤੀ ਕਿਸੇ ਰੂਪ ਨਹੀਂ ਬਣਦੀ ਆ ਮਤਲਬ ਜਿਹੜਾ ਗੱਲ ਦੇ ਸੈਂਡ ਮੁਕਤੀ ਮਿਲ ਜੂਨੀ ਮੁਕਤੀ ਕੋਈ ਵੀ ਦੁਨੀਆ ਦੀ ਜਿਹੜੀ ਮੱਤਾ ਹੈ ਉਹ ਭੁਗਤੀ ਪ੍ਰਾਪਤ ਨਹੀਂ ਕਰ ਸਕਦੇ ਜਿੰਨਾ ਜਰਾ ਗੰਭ ਅਗਾਧ ਨਹੀਂ ਬਸਰ ਹੁੰਦੀ ਪਰ ਬਰੋ ਤਾਂ ਹੈ ਉਹ ਅਗਾਂਹ ਜੇ ਤੁਸੀਂ ਕੋਈ ਹੋਰ ਬੁੱਧ ਦਿਓ ਤਾਂ ਡੁਪਲੀਕੇਟ ਘਰਤੀ ਹੈ ਨਾ ਤੇ ਨਹੀਂ ਨਹੀਂ ਜਾਣਦੇ ਵੀ ਸਾਨੂੰ ਕਿੱਥੋਂ ਮਿਲਦਾ ਪਟਾਈ ਨਹੀਂ ਉਹਦਾ ਬਹੁਤ ਔਖੀ ਗਾਨ ਲੱਗਦੀ ਹੈ ਗੁਪਤ ਜਿਸ ਤੋਂ ਬਿੰਦਾ ਦਦਾ ਹੋਰ ਹੋਰ ਗਾਨ ਨਾ ਦਿੱਖ ਲਿਗੜੂ ਲੱਗ ਗਾਨਾ ਹੈ ਪ੍ਰਗਟ ਪਰ ਉਹ ਗਾਨ ਜਦ ਜਲਦੀ ਹੈ ਨਾ ਜਦ ਸ਼ੁਰੂ ਹੁੰਦੀ ਹੈ ਪਹਿਲਾਂ ਚਲਦੀਆਂ ਹੁੰਦੀਆਂ ਨੇ ਧੂਪ ਤਾਂ ਹਮ ਨਾਲ ਧੂਪ ਤਾਂ ਹਣ ਗਾਨਾ ਚਲਦੀ ਨਾ ਦੂਜੀ ਦਗਾ ਚੱਲਣ ਦਿੰਦੀਆਂ ਫਿਰ ਦੋਨੀਆਂ ਸ਼ਰਤਾਂ ਬੜੀਆਂ ਲੰਦੀਆਂ ਹੁੰਦੀਆਂ ਸ਼ਰਤਾਂ ਤੋਂ ਬੜੀਆਂ ਲੰਦੀਆਂ ਮੰਨ ਕਬੂਲ ਉਹ ਕਹਿੰਦੇ ਅਸੀਂ ਮੰਨਦੇ ਨਹੀਂ ਤੁੰਤੇ ਜਿਹੜਾ ਮੰਨਦੀ ਤੂੰ ਤਾਂ ਉੱਧਰ ਜਾਊ ਜਿਹੜਾ ਮੰਨ ਕਬੂਲ ਕਰੂਗਾ ਉਹ ਕਹਿੰਦੇ ਝੜ ਭਰੇ ਬਰਤ ਤੇ ਦੁਨੀਆ ਕਰਦੀ ਹੈ ਤੁਸੀਂ ਪਹਿਲਾਂ ਕਹਿਤਾ ਮੰਨ ਕਬੂਲ ਜਿਹੜਾ ਕਹੂ ਕੋਣ ਕਾਹਨੋਂ ਹੋਊਗਾ ਅਸਰ ਜਬ ਮਾਰਨ ਕਬੂਲ ਲਾ ਮਸਲਮਾ ਮੁਸੀ ਮਾਰਨ ਕਬੂਲ ਤੇ ਮਿਲਣੀ ਆ ਜੇ ਮੁਸੀ ਲਾਂਡਾ ਸੜਕ ਆਇਆ ਸੀ ਕਰਦੇ ਉਹਨਾਂ ਦਾ ਮਸਲਮਾ ਇਹ ਆ ਪਰ ਮੁਸੀ ਲਾਂਡਾ ਜੱਦਾ ਕੋਈ ਨਹੀਂ ਅਸਲ ਚ ਗੱਲ ਹੈ ਮੁਸੀ ਲਾਂਡਾ ਜੱਦਾ ਕੋਈ ਨਹੀਂ ਉਸਦੀ ਇੱਛਾ ਨਹੀਂ ਹੈ ਕਿ ਸਿਰ ਕਰਦੇ ਖੇਤਤਿਓ ਇਹ ਤਾਂ ਆਪਣੇ ਕਾਰੋਬਾਰ ਵਾਸਤੇ ਰੁਕ ਜਾਂਦੇ ਨੇ ਧਰਮ ਦੀ ਕਰਦੇ ਵਧੀਆ ਕਾਰੋਬਾਰ ਚੱਲਣ ਘਰ ਦੇ ਵਿੱਚ ਸੁੱਖ ਸੁਭਾਵਾ ਹੋਣ ਬਲਾ ਚੰਗੀ ਹੋਵੇ ਸਭ ਨੇ ਇਹ ਇਹਦੇ ਵਾਸਤੇ ਜਾਂਦਾ ਦੁਨੀਆਂ ਮੁਕਤੀ ਵਾਸਤੇ ਕੋਈ ਜੇ ਕੋਈ ਮੁਕਤੀ ਵਾਸਤੇ ਚੁੜਦਾ ਇਹ ਕੋ ਕਾ ਇਹ ਮੁਕਤੀ ਹੀ ਹੈ ਕੱਟਾ ਮਾਰੂ ਹੀ ਕੋਊਗਾ ਉਹ ਕਹਿੰਦੇ ਮੁਕਤਰੀਏ ਬਾਹਰ ਬਣ ਤੋ ਪੂਰਨ ਬ੍ਰਹਮ ਮੁਕਤ ਹੈ ਜਦ ਪੂਰਨ ਬ੍ਰਹਮ ਮੁਕਤ ਹੈ ਇੱਕ ਇਹ ਵਪਾਇਤ ਕਰਦੇ ਕੋਈ ਤਾਂ ਕੋ ਇੱਕ ਜਿਹੜਾ ਹੈਗਾ ਉਹ ਮੁਕਤ ਹੈ ਉਹ ਨਹੀਂ ਸੋ ਕਰੂ ਕੋ ਉਹ ਤਾਂ ਬੱਧੀ ਸਿਟੇ ਜਾਣਾ ਹੈ ਕਰੂਗਾ ਉਹਦੋਂ ਪੂਰਨ ਬ੍ਰਹਮ ਤੋਂ ਬਾਹਰ ਬਣੂਗਾ ਕਿ ਪਾਰ ਬ੍ਰਹਮ ਦੇ ਬਾਣੇ ਚਾਊਗਾ ਪਾਰ ਬ੍ਰਹਮ ਅਨੁਸਾਰੀ ਚੱਲੂਗਾ ਹੁਕਮ ਦੇ ਵਿੱਚ ਚੱਲੂਗਾ ਤਾਂ ਮੁਕਤੀ ਕਿਵੇਂ ਮਿਲਦੀ ਹੈ ਹੁਕਮ ਮਾਰੇ ਪਾਰਬੰਤਾਰੇ ਜਾਣਦਾ ਹੀ ਕੁਛ ਨਹੀਂ ਫਿਰ ਮੁਕਤੀ ਕਿਵੇਂ ਮਿਲ ਤੂ ਬ੍ਰਿਖਤੀ ਨੂੰ ਸਮਝੋ ਗੱਲ ਕੀ ਹੈ ਅਚਰੀਏ ਕਰ ਅਸੀਂ ਜਾ ਸਕਦੇ ਵਿੱਚ ਪੜਾਈ ਬਜਾਤੀ ਹੈ ਜਿਹੜੀ ਗੱਲ ਕਹੀ ਹੈ ਰਿਕਾਰਡ ਕੀ ਹੈ ਗੱਲ ਕਹਿੰਦਾ ਜੋ ਸਰਦ ਰਖਿਆ ਜੋ ਜੋ ਕਹੇ ਸੁ ਮੁਕਤਾ ਹੋਏ ਜੋ ਰਖੀਏ ਸਰਦ ਅਗਮ ਆਵਾਜ 파ਰਮ ਸੋਏ ਜੋ 파ਰਮ ਮਾ ਉਦਾ ਗਬਗਾ ਦਾ ਉਹਦਾ ਕੋਈ ਕਹਿਦਾ ਹੀ ਨਹੀਂ ਉਹ ਦੇਖੇ اور ਵੀ ਲੋਕ ਇਹਨੇ ਹੈ ਹਰ ਜਗ੍ਹਾ ਫਗੜ ਤੋਂ ਪਰੇ ਫਗੜ ਤੋਂ ਪਰੇ ਗਬਗਾ ਦਾ ਜਿਹੜਾ ਫਗੜ ਤੋਂ ਪਰੇ ਸਾਡੇ ਸਾਡੇ ਕੋਲ ਹੁੰਦਾ ਹੋਇਆ ਵੀ ਉਹ ਰੋਗਾ ਦੂਰ ਹੁੰਦੇ। ਨਾਲੇ ਤੁਸੀਂ ਫਕਰਦੇ ਪਰੇ ਰਹੇ ਨਾਲੇ ਤੁਸੀਂ ਮੂਰਤੀ ਬਣਾ ਕੇ ਬਹਿ ਕੇ ਆ ਗੁਰੂ ਗ੍ਰੰਥ ਸਾਹਿਬ ਬਣਾ ਕੇ ਬਹਿ ਕੇ। ਇਹ ਤਮਾਸ਼ਾ ਕੀਤਾ ਤੁਸੀਂ। ਉਹ ਗੁਰੂ ਗ੍ਰੰਥ ਸਾਹਿਬ ਦਾ ਕਹਿ ਡਾਇ ਤੁਸੀਂ ਇਹ ਤਾਂ ਚਲ ਹੀ ਸਹੀ ਤੂੰ ਹੀ ਸਹੀ। ਉਹਨੂੰ ਛੱਡ ਪਰੇ ਤੈਨੂੰ ਮੰਨ ਲੈਂਦੇ। ਚੱਗੀ ਗੱਲ ਹੈ। ਪਰ ਇਹਦਾ ਕਹਿਦਾ ਹੈ ਗੰਗਵਾਤ ਕਹੋ ਮੰਨੋ ਤੂੰ ਹੀ ਕਰਨਾ ਚੱਲ ਛੱਡ ਉਹਨੂੰ ਛੱਡ ਤੂੰ ਹੀ ਬਣ ਜਾ ਤੂੰ ਮੁਕਤੀ ਬਾਦਨ ਤੂੰ ਅਗਾਮਾ ਸੋਏ ਜੋ ਜੋ ਕਹੇ ਜੋ ਇਹ ਗਲ ਕਹੂਗਾ ਬੰਦੂਗਾ ਉਹ ਦੀ ਮੁਕਤੀ ਹੋ ਸਗੀ ਤਬੂ ਉਸੇ ਕੋਈ ਛੱਡੀ ਪਾਉਗੀ ਰੈਤ ਮੁਲਾਗਾ ਛੱਡੀ ਕੁੱਛ ਕਿਸੇ ਕੀ ਦੱਬੇ ਰੇਸ ਰੇਸ ਭੇਦ ਦਾ ਕੋ ਮਤਲਬ ਨਹੀਂ ਰਹਿ ਗਿਆ ਖਾਣ ਪੀਣ ਦਾ ਕੋ ਮਤਲਬ ਨਹੀਂ ਰਹਿ ਗਿਆ ਮਨ ਜੋ ਸ਼ਰਤ ਹੈ ਨਹੀਂ ਕਿਹੜਾ ਦੀ ਸ਼ਰਤ ਨਹੀਂ ਇੱਥੇ ਮੁਕਤੀ ਵਾਸਤੇ ਇੱਕ ਜੀਜਾ ਹੈ ਜੋ ਪਰਮਾ ਉਹ ਪੱਜ ਗਿਆਨ ਅੰਦਰ ਸਾਡੇ ਅਰਦਾਸ ਤੇ ਭਰੇ ਮੰਨ ਕੇ ਚੱਲੋ ਪਹਿਲਾਂ ਜੇ ਮੰਨ ਕੇ ਬਹਿ ਜਾ ਮੁਕਤੀ ਮਿਲ ਜੂਗੀ ਜੋ ਜੋ ਕਹੇ ਸੁਣ ਉਹ ਸਭ ਉਦੋਂ ਸ਼ਰਤ ਲੱਗਦੀ ਹੈ ਸ਼ਰਤ ਹੋਰ ਕੋਈ ਸ਼ਰਤ ਨਹੀਂ ਨਾਲ ਕੋਈ ਸਰਖੰਦੀ ਕੋਈ ਸ਼ਰਤ ਨਹੀਂ ਦਾੜੀ ਕੋ ਦੋਡੀ ਕੋਈ ਸ਼ਰਤ ਨਹੀਂ ਦੋ ਹੱਥ ਜੋੜਨ ਦੀ ਕੋਈ ਸ਼ਰਤ ਨਹੀਂ ਪਾਣੀ ਦੇ ਦੀ ਕੋਈ ਸ਼ਰਤ ਨਹੀਂ ਕੋਈ ਸ਼ਰਤ ਸੇਵਾ ਦੀ ਕੋਈ ਸ਼ਰਤ ਨਹੀਂ ਬੰਨਣ ਦੀ ਗੱਲ ਬੰਨਣ ਦੀ ਗੱਲ ਉਸਾਂ ਛੋਟੀਆਂ ਗੱਲਾਂ ਨੇ ਬਾਕੀ ਸਭ ਗੱਲਾਂ ਛੋਟੀਆਂ ਸਭ ਕੁਝ ਕਰਦੇ ਨੇ ਆ ਦੀ ਮੰਦੇ ਬਾਕੀ ਦਾ ਸਭ ਕੁਝ ਕਰਦੇ ਹੀ ਨੇ ਆ ਦੀ ਮੰਦੇ ਪਰਮ ਬ੍ਰਹਮ ਨੂੰ ਨਹੀਂ ਮੰਦੇ ਬਾਕੀ ਦਾ ਸਭ ਕੁਝ ਕਰੀ ਜਾਂਦੇ ਨੇ ਕਿ ਇਹ ਨਹੀਂ ਮੰਦੇ ਬਾਕੀ ਸਭ ਫੈਦਾ ਦੀ ਬਾਕੀ ਕੁਝ ਵੀ ਫੈਦਾ ਨਹੀਂ ਜੋਗ ਕਰਦੇ ਜੇ ਅਗਾਮ ਆਗਾਤ ਬ੍ਰਹਮ ਨੂੰ ਨਹੀਂ ਮੰਦੇ ਫਰ ਮੁਕਤੀ ਦੀ ਬਣਦੀ ਜੇ ਮੁਕਤੀ ਲੈਣੀ ਹੋਣੀ ਬਣਦੀ ਉਹ ਨਹੀਂ ਧਰਮ ਦਾ ਕੋਈ ਆਈਡੀਆ ਨਹੀਂ ਰਹਿੰਦਾ ਜਿਹੜੇ ਕਾਲਜ ਦਾ ਤੁਹਾਨੂੰ ਡਿਗਰੀ ਮਿਲਣੀ ਹੋਈ ਨਹੀਂ ਪਾਸ ਹੋਣਾ ਹੀ ਉਥੇ ਜਾਣ ਦਾ ਫਾਇਦਾ ਕੀ ਹੈ ਉਹ ਕਾਲਜਾਂ ਦੇ ਵਿੱਚ ਤੁਰੇ ਫਿਰਦੇ ਜਿੱਥੇ ਮੁਕਤੀ ਹੋਈ ਜੀ ਪਰਗੋੜਾ ਨਹੀਂ ਸਕਦੇ ਕਹਿ ਨਹੀਂ ਸਕਦੇ ਪਰਗੋੜਾ ਕਿਵੇਂ ਕਹਿ ਸਕਦੇ ਪਤਾ ਅਗਮ ਅਗਾਦ ਸਭ ਕੁਝ ਜਾਣ ਹੁਜ ਕੇ ਜਿਹੜਾ ਇਹ ਸਭ ਪਤਾ ਸੀ ਇਹ ਨਹੀਂ ਪਤਾ ਦੀ ਸੀ ਸਿੱਧੀ ਗੱਲ ਹੈ ਕਿ ਉਹ ਆਗਮ ਅਗਾਦ ਬਹੁਤ ਸਕਾਲਰ ਸੀ ਉਹ ਤਾਂ ਕਾਸ਼ੀ ਦਾ ਡਾ ਬੜਾ ਵਿਦਵਾਨ ਪੱਤੀ ਬਦਵਾਨ ਹੈ ਨਾ ਉਹਨਾਂ ਇਹ ਗੱਲ ਨਹੀਂ ਪਤਾ ਸੀ ਜੀਬਲੀ ਤਾਂੜ ਪੜੇਗਾ ਉਹ ਤਾਂ ਸਭ ਤੋਂ ਸ਼ਾਸਤਰ ਨੂੰ ਬਦਲ ਨਾਤਾ ਜਗਾ ਬਦਲਣ ਵਾਲੇ ਇੱਕ ਵਾਰ ਇੱਕ ਪਰੜ ਆਦਮੀ ਜਾਈਦਾ ਸੀ ਪਤਾ ਨਾ ਲੱਗ ਜਵੇ ਰਾਹ ਬਦਲ ਤਾ ਜਿਪਸੀ ਕੀ ਦਾ ਪਤਾ ਲੱਗਿਆ ਰਾਹ ਬਦਲਣਾ ਪਤਾ ਨਾ ਲੱਗੇ ਮੇਰੇ ਸਭ ਉਹ ਐਸਪਰਟ ਆਦਮੀ ਭੁਲਾਏ ਸੀਗੇ ਅਜਿਹੇ ਨਾ ਫੜ ਫੜੇ ਨਹੀਂ ਹੋਇਆ ਉਹਦੇ ਐ ਕਹਿੰਦੇ ਪਤਾ ਲੱਗਾ ਉਸੇ ਹਲਿਆ ਦੀ ਉਹਦਾ ਸਵਾਲ ਇਹਦੇ ਨਾਲ ਨਹੀਂ ਜੇ ਟੋਲੀ ਬੱਧਿਆ ਨਹੀਂ ਸੋਦੀ ਗੁਰਬਾਣੀ ਤੋਂ ਨਹੀਂ ਬੜੇ ਗੁਰਬਾਣੀ ਨੂੰ ਵਰਣ ਲੱਗੇ ਗੁਰਬਾਣੀ ਤੋਂ ਪੜਦੇ ਤਾਂ ਲਫ਼ ਜੜੇ ਇਹਦੇ ਵਿੱਚ ਬਦਲੇ ਨੇ ਅਥ ਉਹ ਤਾਂ ਤੇ ਆਂਜੰਦਾ ਗੁਰਬਾਣੀ ਨੂੰ ਤਾਂ ਬੜੇ ਗਏ ਨੇ ਉਹ ਪੜ ਪੜ ਕੱਢੀ ਨਦੀਏ ਤਾਂ ਹੀ ਕਹਦੇ ਇਹਨੂੰ ਪੜੀ ਰੋ ਜਾਇਓ ਵਿਚਾਰੇ ਹੋਏ जो जो कहे सो मुक्ता होई सुन नान बीता नानक बिन बंता नानक बिन मुक्ता के चार जेडा आके बैठे को नानक दे मुकती वाला मुकती दा इच्छुक ओ कोणा हो लेना गुरु पंजमे पासा को गाहा हो होर संगत है गुरु पंजमे पासा बोलदे पीछे मुकती ओनु मिलिया जी ने मनया है ओ पहला ਦਾਨ ਕੋ ਕੋਤੇ ਬਾਰੋ ਨਹੀਂ ਚਲਦੀ ਹੈ ਗਈ ਹੈ ਸੁਣ ਵੀ ਤਾਂ ਨਾਨਕ ਬਿਰਬੁਤਾ ਨਾਨਕ ਤੇ ਬੇਨਤੀ ਹੈ ਆਰਡਰ ਕੋਈ ਨਹੀਂ ਹੈ ਬਿਰਬੁਤਾ ਗੁਰਬਾਣੀ ਹਾਂ ਗੁਰਬਾਣੀ ਮਿੱਤਰ ਕਹਿ ਕੇ ਬਰਾਬਰ ਦਾ ਕਹਿ ਕੇ ਬਿਰਬੁਤਾ ਮੁਕਤੀ ਮੇਰੇ ਕੋਲ ਹੈ ਮੁਕਤੀ ਲੈ ਲੈਣਗੇ ਕਿਹਦੀ ਬਰਦਾਈ ਜਿਹੜੀ ਗੱਲ ਕੱਲ ਨੂੰ ਅੰਡਣੀ ਹੈ ਉਹ ਜਨਮ ਲਈਏ ਨਾਲੇ ਫਿਰ ਕਹਿਣ ਦਾ ਕੀ ਫਾਇਦਾ ਬੋਤਾ ਉਲਟੀ ਲੈਣੇ ਉਟੀ ਕਲ ਜੁ ਸਾਤੇ ਲੈਣੇ ਉਟੀ ਚਲ ਜੂ ਸੁਣ ਲਈ ਤਾਂ ਨਾਲ ਕੇ ਬੋਤਾ ਸਾਧ ਜਨਾਂ ਦੀ ਅਜਾ ਕਥਾ ਤੇ ਸਾਧ ਨੇ ਅਸਲੀ ਸਾਧ ਨੇ ਉਹਨਾਂ ਦੀ ਕਥਾ ਉਹਨਾਂ ਨੇ ਕਥਨ ਕੀਤੀ ਗੱਲ ਸੁਣ ਰੋਤੀ ਉਹ ਵੇਦਾਂ ਤੋਂ ਲੈ ਕੇ ਸਾਧ ਜਨਾਂ ਦੀ ਕਥਾ ਚਲਦੀ ਹੈ जिन्होंने पारब्रह्म बारे दसया जिन्होने पारगुरु बारे दसया ये साजन की हकीकत है साजन की कथा सत्य है कोई सिंपल भाषा तो रिटर्न लिखे दे और ऋषि मुनि दे ऋषि मुनि ये दी कहानी है फटी पोछी सारी पीछे साजन का कोई ग्रंथ नहीं लिखा हुआ ऋषि मुनि ਸਭੋ ਕੀ ਸਾਜਨਾ ਦਾ ਜਲ ਹੈ ਬੇਜਲ ਹੈ ਇਹ ਆ ਬ੍ਰਹਮਾ ਦਾ ਲਿਖਾ ਹੈ ਮੰਨਦੇ ਨੇ ਗ੍ਰੰਥ ਬ੍ਰਹਮਾ ਸਾਧਨੀ ਹੈ ਬ੍ਰਹਮਾ ਨੂੰ ਸਾਧਨੀ ਬਣਿਆ ਸਾਜ ਸੁਜੀ ਹੈ ਸਾਜ ਇਹ ਤਾਂ ਸ਼ੇਵ ਹੈ ਹੋ ਬ੍ਰਹਮ ਨਹੀਂ ਸਾਧ ਹੈ ਇਸੇ ਕਰਕੇ ਕੋ ਨਾਰਕ ਨੇ ਜਿਹੜੇ ਸੇਸੀ ਸਤ ਇਹਨਾ ਨਾਲ ਸੰਪਰਕ ਇਤਵੀ ਭਈ ਥੋੜਾ ਜਿਉੜੀ ਹੈ ਤੁਸੀਂ ਸਾਧ ਕਹੋਣਿਆ ਤੁਸੀਂ ਇਹ ਕਥਾ ਕਰ ਸਕਦੇ ਹੋ ਪਰੋ ਚਲੋ ਨਹੀਂ ਆਏ ਅਗੰ ਅਗਾਧ ਪਾਰ ਬ੍ਰह्म ਸੋਏ ਜੋ ਜੋ ਕਹੇ ਸੋ ਮੁਕਤਾ ਹੋਏ ਅਗੰ ਅਗਾਧ ਪਾਰ ਬ੍ਰह्म ਸੋਏ ਪਾਰ ਬ੍ਰह्म ਅਗੰ ਅਗਾਧ ਹੈ ਪੱਛੇ ਗਿਆਨ ਅੰਦਰਿਆ ਤੋਂ ਸਾਡੀ బుద్ధి ਤੋਂ ਪਰੇ ਹੈ ਸਾਡੀ ਸੋਚ ਤੋਂ ਸਾਡੀ ਸਮਝ ਤੋਂ ਪਰੇ ਹੈ ਜਿੰਨੇ ਵੀ ਸੰਸਾਰੀ ਆਦਮੀ ਦੇ ਪੜਾ ਦੀ ਅੰਤਰਾਤਵਾਦੋਂ ਵੀ ਪਰੇ ਆ ਇਹ ਵੀ ਗੱਲ ਹੈ ਕਿ ਜਿੱਥੇ ਆਏ ਨਾ ਉਹ ਵੀ ਦੀ ਪਕੜ ਚ ਆਇਆ ਉਤਰਾਤਵਾਦ ਦੀ ਉਹ ਗੁੱਤੀ ਹੁਦਿਏ ਮੰਨ ਕੋ ਕੁਝ ਨਹੀਂ ਹੁੰਦਾ ਬੰਤਾ ਉਹਨੂੰ ਵੀ ਮੰਨ ਕਹਿੰਦੇ ਆ ਅਸੀਂ ਤਾਂ ਹੀ ਤਾਂ ਮੰਦ ਹੋ ਰਹੇ ਉਹ ਜਾਦੋਜਾ ਧਿਆਨ ਖਿਤੇ ਆਪ ਕਿਤੇ ਆਜਾਪ ਕਿਤੇ ਆਪ ਜੇ ਹੈ ਜਿੱਥੇ ਉਹ ਸਾਲਡਰ ਹਾਟ ਚ ਚਲਾਉਂਦਾ ਹੈ ਬਹੁਤ ਆ ਧਿਆਨ ਉਹਦਾ ਉੱਥੇ ਹੈ ਪੂਰੀ ਸ਼ਕਤੀ ਉਹਦੀ ਉੱਥੇ ਹੈ ਜਦ ਕਿ ਆਣਾ ਬਾਹਰ ਚਲੇ ਜਾਂਦਾ ਜਾਂ ਦੋ ਹੋ ਜਾਂਦੇ ਨੇ ਕਦੇ ਵੀ ਰਹਿ ਜਾਂ ਫਿਰ ਵੀ ਕੋਈ ਹੈ ਜਿਵੇਂ ਕਾਤਰਾ ਆਏਗਾ ਤਾਂ ਇੱਕ ਹੱਥ ਨੂੰ ਕਰਦਾ ਕੋਈ ਦੋ ਹੱਥ ਹੋ ਗਏ ਨਾ ਇੱਕ ਨਹੀਂ ਨਾ ਦੋ ਹੱਥ ਬਹੁਤ ਜ਼ੋਰੂ კანੂਨ ਹੈ ਕਹੀਏ ਹੋ 300 ਕੋ ਜੁਜਾ ਜਿਹੜਾ ਉਤਾਰੋਂ ਜਾਂਦਾ ਉਹ ਹੀ ਮਾਰਾ ਉਹ ਹੀ ਮਾਰਾ ਉਹ ਹੀ ਚਾ ਉਹ ਹੀ ਸੁੱਤ ਮੇ ਨਾ ਬਸ ਉਹ ਬਾਹਰ ਨੂੰ ਜਾਂਦਾ ਜਿਹੜਾ ਗੁਰੂ ਪਾਉਂਦਾ ਉਹ ਹੱਥ ਚਲਾਉਂਦਾ ਦੋ ਹੱਥ ਨੇ ਇਸ ਕਨਾਲਾ ਚਰਖਾ ਚੱਲਦਾ ਹੀ ਹੈ ਤੇ ਕਹਣਾ ਹੋ ਕਰਦਾ ਦੋ ਹੱਥ ਨੇ ਨਾ ਬੰਦਾ ਕੋਈ ਠੀਕ ਹੈ ਜੀ ਦੋ ਆਨੇ ਅੱਡ ਕਾ ਆਪਣੇ ਖਬੇ ਸੱਜੇ ਆ ਮਾਦ ਮੰਗਾ ਦੇ ਨਾ ਵੀ ਚਰਖਾ ਚਲਾਇਆ ਸੀ ਨਾਨਕ ਬਿਨ ਵਸਾ ਸੁਣ ਮੀਤਾ ਨਾਨਕ ਬਨਮੰਤਾ ਸਾਧੂ ਜੀ ਨਾਂ ਕੀ ਕੋਈ ਆਇਆ ਜਿਹੜਾ ਕੋਈ ਸਿੱਖ ਪੁੱਛਣ ਕੋਈ ਗੱਲ ਬੈਠਣ ਸੁਣਨ ਉਹ ਨੂੰ ਕਹਿੰਦਾ ਪਹਿਲੇ ਤਾਂ ਗੱਲਾਂ ਪਾਈ ਪਾਰ ਬ੍ਰਹਮ ਜਿਹੜਾ ਰਾਮ ਗਾਦ ਹੁੰਦਾ ਹੈ ਜੇ ਤੈਨੂੰ ਮੰਨਦਾ ਹੈ ਫਿਰ ਤਾਂ ਮੁਕਤੀ ਦੀ ਗੱਲ ਚੱਲੂਗੀ ਅੱਗੇ ਜੇ ਤੂੰ ਪਹਿਲਾ ਹੀ ਮੰਨਦਾ ਜਿਹੜਾ ਤੇਰਾ ਆਪਣਾ ਸਰਬ੍ਰਸਤ ਬਣ ਫਿਰ ਤੂੰ ਹੋਵੇਗੀ ਪਾ ਲੈਣ ਦੇ ਦੇ ਫਿਰ ਮੂਰਤੀ ਮੰਕਦੀ ਮਰਦੀ ਹੈਗੀ ਮੇਰਾ ਬੋਲਣ ਦਾ ਤੇਰਾ ਸੁਣਨ ਦਾ ਟਾਈਮ ਵੇਸਟ ਕਰਨ ਦਾ ਕੋਈ ਫਾਇਦਾ ਨਹੀਂ ਜਿੱਤੇ ਕਨ ਮੁਫਤੀ ਮਿਣੀ ਨਹੀਂ ਜਿੱਤੇ ਦਵਾਈ ਖਾਲੀ ਪਿਛੇ ਮੇਰੇ ਕੋ ਤਾਂ ਹੀ ਆਇਆ ਨਾ ਉਹ ਡਾਕਟਰ ਫੇਰ ਲੈਣਾ ਤੇਰਾ ਦਵਾਈ ਵਾਲਾ ਬਈ ধੂਆ ਛੱਡ ਗਿਆ ਧੂਏ ਕੋ ਤਾਂ ਹੀ ਜਾਂਦਾ ਪਿਛਲੀ ਤੋਂ ਆਏ ਜਿਹੜੀ ਉਹ ਛੱਡ ਕੇ ਜਿਆ ਹੈ ਜੇ ਉਹਦੇ ਚ ਕਾਮਯਾਬੀ ਨਹੀਂ ਮਿਲੀ ਤਾਂ ਹੀ ਆਇਆ ਫਿਰ ਉਹ ਕਾਟਾ ਮਾਰਦੇ ਤੀ ਉਹ ਬੇਕਾਰ ਅਸ ਜੇ ਉਹਦੇ ਵਾਸਤੇ ਕੋਈ ਦਿਮਾਗ ਤੇ ਰੱਖਿਆ ਹੋਇਆ ਹੈ ਵੀ ਕੋਈ ਚੰਗੀਆਂ ਗੱਲਾਂ ਨੇ ਉਧਰ ਚਿੱਤੀ ਚੰ ਫਿਰ ਤੂੰ ਰਹਿਣ ਦੇ ਤੇ ਨੀ ਮਾੜੀ ਤੇਰੀ ਬਸੋਂ ਕਲਾਬਸਾਰੇ ਢੋਲ ਕੇ ਸਾਫ ਕਰਦੇ ਪਾਡੇ ਨੂੰ ਢੋਲਾ ਹੈ ਤੇ ਨੂੰ ਵੀ ਸਭ ਗਲਤ ਸੀ ਜੋ ਕਹਾ ਫਰੋੜੇ ਸੀ ਗੱਲ ਅਸਲੀ ਹੁਣ ਸੁਣਦੇ ਹੋ ਕੀ ਹੈ ਦੋਵੇਂ ਸਰੇ ਉਹ ਹੈਗੀ ਨਹੀਂ ਸੀ ਕੁਝ ਉਹ ਡੁਪਲੀਕੇਟ ਸੀ ਤਾਨੀ ਕੁਝ ਹੋਇਆ ਗੱਲ ਗੱਲ ਖਤਮ ਹੋਈ ਸੁਣਦੇ ਤਾਂ ਹੰਕਬਰ ਮਨਤਾ ਸਾਜਨਾ ਕੀ ਅਚਰਜ ਕਰਾ ਉਹ ਫਿਰ ਆ ਗੱਲ ਸੁਣ ਸਾਜਨਾ ਦੀ ਅਚਰਜ ਕਰਾ ਜਿਉਂ ਜਿਉਂ ਸੁਣਦਾ ਜਾਂਦਾ ਅਚਰਜ ਗੱਲ ਲੱਗੂ ਕਿ ਇਹ ਗੱਲ ਕਿਤੇ ਸੁਣੀਓ ਨਹੀਂ ਹੋ ਅਚਰਜ ਗੱਲ ਹੁੰਦੀ ਹੈ ਜਿਹੜੀ ਦੁਨੀਆ ਤੋਂ ਅਲੱਗ ਹੋਵੇ ਉਹ ਦੁਨੀਆ ਤੇ ਗੱਲ ਚੱਲੇ ਨਹੀਂ ਰਹੀ ਕਿਤੇ ਚਰਚਾ ਉਹ ਚਰਚਾ ਚਲਾਉਣੀ ਹੈ ਚਰਚੇ ਕਰ ਚਰਚਾ ਹੈ ਇਹ ਜੀ ਕਥਾ ਕਿਤੇ ਲਿਖੀ ਹੋਈ ਜੇ ਕੋਈ ਕਰਦਾ ਨਾ ਕਿਤੇ ਲਿਖੀ ਹੋਈ ਹੈ ਸਾਖੀਆਂ ਜਿਹੜੀਆਂ ਚੱਲਦੀਆਂ ਲਿਖੀਆਂ ਨੇ ਉਹ ਤਾਂ ਹਾਲੀਵੁੱਡ ਬਣਦ ਰਹੇ ਇੱਕ ਕਥਾ ਹੈ ਕਥਾ ਬਣ ਸਾਡੇ ਲਿਖੀ ਹੋਏ ਥਲੇ ਘਮਾਰੇ ਪਹਿ ਬਾਅਦ ਦੇ ਸਿੱਕੇ ਉਹ ਜਦ ਸਿੱਕੇ ਤੇ ਬਾਅਦ ਦੀ ਸੀ